सरदार कर्नल सिंह जी रामू गा और श्री सदिंगरो जी सही ने मेरे विच एनी योग्यता है मेरी कि मैं इने देवतारूप साथा नि देखकर ताव कर दे यानी संबोधित कर दे ए चावलिया ते योग्यता रखदा हां ਤਤੋ ਇੱਕ ਪੀਖ ਮੰਗਦਾ ਮੈਨੂੰ ਜ਼ਰਾ ਆ ਕੇ ਕਿ ਤਾ ਬੁੱਢੇ ਵਾਰੇ ਤਮਾਮੇ ਰਹੀ ਘਟੇ ਇਹ ਦੂਆ ਜਿਹਾ ਸੱਚ ਬੋਲਣ ਦੀ ਸ਼ਕਤੀ ਆਵੇ ਪਹਿਲੇ ਮੈਂ ਤੁਹਾਨੂੰ ਐਨੋਂ ਤੁਹਾਡੇ ਤੁਹਾਡੀ ਆਪ ਜੀ ਦੀ ਮੇਰੇ ਨਾਲ ਕੀ ਸਿੰਘ ਉੱਤੇ ਬੜੀ ਨਿਵਾਜ਼ਿਸ਼ ਹੈ ਬਖਸ਼ਿਸ਼ ਹੈ ਤੁਸੀਂ ਉਹਨੂੰ ਥਾਪੀ ਦਿੱਤੀ ਆ ਔਰ ਆਪਣੀ ਤੁਹਾਡੀ ਕਲਾਈ ਹੈ ਜਿਹੜੀ ਉਹਦੇ ਵਿੱਚ ਵਰਤਦੀ ਹੈ ਤੇ ਮੈਂ ਆਪਣੇ ਇੱਥੋਂ ਵਾਲੇ ਪਰਿਵਾਰ ਵੱਲੋਂ ਤੇ ਮੇਰੇ ਲੜਕਿਆਂ ਦੇ ਪਰਿਵਾਰ ਇੱਥੇ ਆ ਇੱਕ ਲੜਕੀ ਦਾ ਉਹਨਾਂ ਵੱਲੋਂ ਤੇ ਆਪਣੇ ਵੱਲੋਂ ਆਪ ਜੀ ਨੂੰ ਇੱਥੇ ਪਧਾਰਨ ਦੇ ਤੇ ਸੰਗਤਾਂ ਨੂੰ ਦਰਸ਼ਨ ਦੇਣ ਉੱਤੇ ਹਾਰਦਿਕ ਸਵਾਗਤ ਕਰਦਾ ਹਾਂ ਬਾਕੀ ਮੈਨੂੰ ਪਤਾ ਲੱਗਾ ਸੀ ਤੁਸੀਂ ਥੋੜੇ ਜੇ ਮੇਰੇ ਤੇ ਜ਼ਿਆਦਾ ਮਿਹਰਮਾਨ ਹੋ ਮੈਂ ਸਿਰਫ ਫਕਤ ਕੇਵਲ ਰਿਬਟ ਇਹ ਸ਼ੀਰਵਾਦ ਹਾਂ ਕਿ ਇੱਕ ਵਾਰੀ ਕੋ ਮੁੰਡਾ ਮਰਨ ਲੱਗਾ ਤੇ ਉਹਦੇ ਕੋਲੇ ਯਾਰ ਦੋਸਤ ਮੁੰਡੇ ਹੋਰ ਆ ਗਏ ਭਈ ਕਿਵੇਂ ਆ ਧੀਆਂ ਹੋਰ ਕਹਿੰਦਾ ਵੀ ਘਰ ਮਰ ਗਈ ਧੀਆਂ ਗਈਆਂ ਗਈਆਂ ਨੂਆ ਮੁੰਡੇ ਲੈ ਕੇ ਅੱਡ ਹੋ ਗਈਆਂ ਦੰਡ ਚਲੇ ਗਏ ਅੱਖਾਂ ਚਲੀਆਂ ਗਈਆਂ ਤੇ ਕੰਨਾ ਤੋਂ ਹੁਣ ਤੁਹਾਨੂੰ ਪਤਾ ਕਹਿੰਦਾ ਤੁਸੀਂ ਉੱਚੀ ਬੋਲਦੇ ਆ ਤੇ ਉਹ ਕਹਿੰਦਾ ਵੀ ਫਿਰ ਤੇਰਾ ਸਾਫ ਸਭ ਛੱਡ ਗਏ ਹਾਂ ਵੀ ਮੇਰਾ ਕਹਿੰਦਾ ਸਾਫ ਛੱਡ ਗਏ ਉਹ ਕਹਿੰਦਾ ਤੂੰ ਜੁਗਦਾ ਕਾਦੇ ਆਸਰੇ ਆ ਉਹਦੇ ਦਾ ਮਾੜੀ ਮਾੜੀ ਜਿਹੜੀ ਹਿਰਸਾ ਨਾ ਤਮ ਉਹਦੇ ਆਸਰੇ ਜਿਉਣਾ ਮੈਂ ਤੇ ਅਸ਼ੀਰਵਾਦ ਮੰਗਦਾ ਹਾਂ ਤੇ ਬੁੱਢੇ ਬਾਰੇ ਇਹ ਜਿਹੜੀ ਹਿਰਸਾ ਤਮ ਤੇ ਸਾਡੇ ਅਸੀਂ 2 ਕਰੋੜ ਸਿੱਖਾਂ ਸਾਡੇ ਵਿੱਚ ਝੂਠ ਦਾ ਬਹੁਤਾ ਪ੍ਰਸਾਰਾ ਹੈ ਐ ਅਸੀਂ ਵੱਡੇ ਵੱਡੇ ਉਧਿਆਂ ਉੱਤੇ ਜਿਹੜੇ ਗੁਰਮਹਾਰ ਦੀ ਸੁਰੀ ਵਿੱਚ ਸਾਡੇ ਝੂਠ ਬਹੁਤਾਂ ਬੋਲਿਆ ਜਾ ਰਿਹਾ ਥੋੜਾ ਜਿਹਾ ਥਾਪੀ ਦਿਓ ਕਿ ਜਿੰਦਗੀ ਵਿੱਚ ਝੂਠ ਜਾਣ ਬੋਲੇ ਹੁੰਦੇ ਆ ਉਹਨਾਂ ਤੋਂ ਪਰਹੇਸ਼ ਕਰੀਏ ਬਾਕੀ ਮੈਂ ਸਾਰ ਸੰਗਤ ਨੂੰ ਗੱਲ ਕਹਿਣਾ ਕਿ ਸਾਡੇ ਇੱਕ ਸਤ ਬੜੇ ਆਉਂਦੇ ਆ ਇੱਕ ਤੋਂ ਘੱਟ ਐਸ ਵੇਲੇ ਪਕੰਡੋ ਜੀ 15 ਮਹਾਪੁਰਸ਼ ਹੋਰ ਘਟੋ ਘਟ 15 ਮਹਾਪੁਰਸ਼ ਜਿਨ੍ਹਾਂ ਨਾਲ ਸੰਬੰਧ ਰਿਹਾ ਜਾ ਉਹ ਆਏ ਹੋਏ ਆ ਉਹ ਉਹਦਾ ਪ੍ਰਚਾਰੇ ਹੋਈ ਕਰਦੇ ਆ ਕਿ ਦੇਹ ਜਾਰੀ ਗੁਰੂ ਨੂੰ ਨਹੀਂ ਮਰਣਾ ਚਾਹੀਦਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਾ ਗੁਰੂ ਮਰਣਾ ਹੁਣ ਜਦੋਂ ਮੈਂ ਲਲਕਾਰ ਕੇ ساری ਜ਼ਿੰਦਗੀ ਕਹਿੰਦਾ ਮਰਦੇ ਤੱਕ ਕਹਿੰਦਾ ਰਹੂੰਗਾ ਮਰਦੇ ਦਮ ਤੱਕ ਵੀ ਮੰਨ ਲਓ ਮੈਨੂੰ ਨਹੀਂ ਪਤਾ ਮੈਂ ਕਿਹੜੇ ਕੋਲੇ ਸੀ ਪੜਿਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਗੱਦੀ ਦੇ ਦਿੱਤੀ ਮਗਰੋਂ ਉਹ ਵਿੱਚ ਸਮਾਗੇ ਜਾ ਇਧਰ ਗਏ ਧਾਏ ਲੰਬੀ ਜੋੜੀ ਗੱਲਾਂ ਪਰ ਮੈਂ ਇੰਨੀ ਗੱਲ ਕਹਿਣਾ ਸਾਨੂੰ ਕਹਿੰਦੇ ਸਾਰੇ ਗਿਆਨੀ ਜੀ ਦੇ ਧਾਰੀ ਗੁਰੂ ਨੂੰ ਬਿਲਕੁਲ ਨਹੀਂ ਮੰਨਣਾ ਮੱਥਾ ਨਹੀਂ ਟੇਕਣਾ ਇੰਗੁਰੂ ਗ੍ਰੰਥ ਸਾਹਿਬ ਦੇ ਗੁਰੂ ਮਨਨਾ ਦੀ ਅਸਟੇ ਤੁਹਾਡਾ ਗੁਰੂ ਆ ਜਿਹੜਾ ਸਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਆ ਉਹ ਕਹਿੰਦਾ ਜੇ ਤਾਲੀ ਨੂੰ ਮੰਨੋ ਤੁਸੀਂ ਸਾਰਿਆਂ ਨੇ ਗੱਲ ਮੇਰੀ ਨਹੀਂ ਸਮਝ ਲਈ ਦੂਜੀ ਵਾਰ ਮੈਂ ਫੇਰ ਕਹਿਣਾ ਜੇ ਕੋਈ ਜਾਣ ਲੱਗਾ ਬੰਦਾ ਕਹਿ ਜੇ ਆਹ ਬੰਦਾ ਮੇਰੀ ਗੱਦੀ ਤੇ ਬੈਠਾ ਤੁਸੀਂ ਉਹਨੇ ਇਹਦੀ ਗੱਲ ਮੰਨ ਮੈਂ ਚੱਲਿਆ ਮੈਂ ਇਧਰ ਜ਼ਹਿਨ ਦੇ ਦਿੱਤਾ ਉਹ ਪੋਲੀਟਿਕਲ ਜੀ ਬੱਲੋ ਹੋ ਜਾਂਦੀ ਆ ਜੇ ਉਹਨਾਂ ਆਪਕੇ ਹੀ ਤੇ ਜਗਿੰਦਰ ਸਿੰਘ ਨੂੰ ਸੀਬੀਆਈ ਤੋਂ ਹਟਾ ਦਿੱਤਾ ਉਹਨੋਂ ਉਹਦਾ ਹੁਕਮ ਨਹੀਂ ਚੱਲਣਾ ਫਿਰ ਜਿਹੜਾ ਆੜਗੇ ਸ਼ਰਮਾ ਉਹਦਾ ਚੱਲਣਾ ਜਿਹੜੇ ਗੱਦੀ ਤੇ ਬੈਠਾ ਜੀ ਅਸੀਂ ਮੰਨ ਲਈਏ ਸਾਰੇ ਜ਼ੋਰ ਨਾਲ ਮੈਂ ਵੀ ਮੰਨਦਾ ਕਿ ਵਾਚਿਆ ਗੁਰੂ ਗਬਿੰਦ ਸਿੰਘ ਮਹਾਰਾਜ ਨੇ ਗੱਦੀ ਸ੍ਰੀ ਗੁਰੂ ਸਾਹਿਬ ਨੂੰ ਦੇ ਦਿੱਤੀ ਇਹ ਇਹ ਜਿਹੜੀ ਪਵਿੱਤਰ ਪੋਥੀ ਅੱਜ ਤੋਂ ਹੀ ਗੁਰੂ ਜਨ ਸਾਹਿਬਾ ਤੁਸੀਂ ਇਹਦਾ ਹੁਕਮ ਮੰਨਣਾ ਉਹ ਗੁਰਬਾਣੀ ਜੜੀ ਆ ਮੈਂ ਬੈਸਰੀ ਕਰ ਜੀ ਉਹ ਗੁਰਬਾਣੀ ਜੜੀ ਆ ਕਿ ਤੁਹਾਡੀ ਜਿਉ ਦੇ ਗੁਰੂ ਤੋਂ ਬਿਨਾ ਗਿਆਨ ਦੇ ਬਿਨਾ ਤੁਹਾਡੀ ਮੁਕਤੀ ਨਹੀਂ ਤੇ ਜਿਨ੍ਹਾਂ ਦੀ ਬਾਣੀ ਹੈ ਛੱਤੇ ਭਗਤਾਂ ਦਾ ਗੁਰੂ ਆ ਦੇ ਉਹ ਸਾਰੇ ਜਣੇ ਆ ਉਹ ਦਿਲਦਾਰੀ ਗੁਰੂ ਨੂੰ ਮੰਨਦੇ ਸੀ ਇਹ ਤਾਂ ਉਹਨਾਂ ਦੇ 6 ਕਿ ਸਾਲ ਹੋਏ ਆ ਮਾਲਾ ਸ਼ਾਂਤੀ ਵਰਤੀ ਆ ਨਹੀਂ ਤਾਂ ਸਾਡੇ ਭਾਈ ਕਹਿੰਦੇ ਸੀ ਇਹ ਤੁਸੀਂ ਗੁਰੂ ਰਾਵਦਾਸ ਦਾ ਗਾਣਾ ਗੁਰੂ ਰਵਿਦਾਸ ਕਿਉਂ ਕਹਿੰਨੇ ਆ ਗੁਰੂ ਗੁਰੂ ਨਹੀਂ ਕੋਈ ਹੋ ਸਕਦਾ ਫਿਰ ਇਹਨਾਂ ਨੇ ਲਾਹਤ ਦਾ ਸਤਗੁਰੂ ਕਬੀਰ ਭਗਤੀਆਂ ਨੇ ਸਤਗੁਰੂ ਕਬੀਰ ਲਿਖਣਾ ਸ਼ੁਰੂ ਕਰਤਾ ਫਿਰ ਉਹਨਾਂ ਨਾਲ ਜੜ ਪਏ ਇਸ ਵਾਸਤੇ ਸਾਨੂੰ ਜੇ ਗੁਰਬਾਨੀ ਨੂੰ ਮੱਥਾ ਟੇਕਣਾ ਤੇ ਨਾਲ ਉਸ ਫਲਸਫੀ ਨੂੰ ਉਸ ਦਾਤ ਨੂੰ ਉਸ ਦੇ ਨੂੰ ਉਸ ਵਿਆਖਿਆ ਨੂੰ ਉਸ ਪ੍ਰੇਰਣਾ ਨੂੰ ਉਸ ਹੁਕਮ ਨੂੰ ਪ੍ਰੇਰਣਾ ਨਹੀਂ ਚੱਲੀ ਉਸ ਹੁਕਮ ਨੂੰ ਉਹ ਹੁਕਮ ਨਾਵੇਂ ਰੂਪRenderTarget ਗਿਆ ਗੁਰੂਗ੍ਰਾਮ ਸਾਹਿਬ ਦੇ ਵਿੱਚ ਜੋ ਹੈ ਕਿ ਤੁਸੀਂ ਗੁਰੂ ਨੂੰ ਮੰਨੋ ਗੁਰੂ ਬਿਨਾਂ ਤੁਹਾਡੀ ਮੁਕਤੀ ਨਹੀਂ ਹੋ ਸਕਦੀ ਇਸ ਵਾਸਤੇ ਮੈਂ ਅਸ਼ੀਰਵਾਦੀ ਪੀਖ ਮੰਗਦਾ ਹੋਇਆ ਫਿਰ ਸਤ ਸ੍ਰੀ ਅਕਾਲ ਬਰਮਨਾਂ ਸਤ ਸ੍ਰੀ ਸਾંગਗਜੀ ਮੈਂ ਪਾਰਖ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕੱਲ ਸ਼ਾਮ ਨੂੰ ਇਸੇ ਆਸਥਾਨ ਵਿੱਚ ਹੀ ਬੱਚਿਆਂ ਦਾ ਤੇਰਾ ਨਾਮ ਕੀ ਹੈ? ਸ਼ਬਦ ਕੀਰਤਨ ਹੋਵੇਗਾ। ਸ਼ਾਮ ਨੂੰ 6:30 ਵਜੇ ਨਾਮ ਸਿਮਰਨ 7:30 ਤੋਂ 9:00 ਵਜੇ ਤੱਕ ਸ਼ਬਦ ਕੀਰਤਨ ਹੋਵੇਗਾ ਬੱਚਿਆਂ ਦਾ ਔਰ ਕੱਲ ਕੱਲ ਸਵੇਰੇ ਪੌਣੇ 4 ਤੋਂ ਪੌਣੇ 6 ਵਜੇ ਤੱਕ 410 ਕ੍ਰਿਸ਼ਵੀ ਰੋਡ ਯੂਨਿਟ ਨੰਬਰ 6 ਵਡ ਬ੍ਰਿਜ ਨਾਮਤਾਰੀ ਤਰਨਸਾਲਾ ਵਿਖੇ ਆਸਾ ਦੀਵਾਰ ਦਾ ਕੀਰਤਨ ਹੋਵੇਗਾ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਸਵੇਰੇ ਆਸਾ ਦੀਵਾਰ ਦਰਸ਼ਨ ਦਿਓ ਔਰ ਸ਼ਾਮ ਨੂੰ ਹਮਮਾਕ ਸਮਾ ਕੇ ਇੱਥੇ ਮੰਦਰ ਵਿੱਚ ਦੀਵਾਨ ਦੀ ਹਾਜ਼ਰੀ ਭਰ ਕੇ ਫਗਵਾ ਦੇ ਦਰਸ਼ਨ ਕਰਕੇ ਜਨ ਸਫਲਾ ਕਰੋ